ਮਹੱਲਾ ਤੁਜਾ ਹੋਏ ਯਾਨਾ ਕਰੇ ਕੰਮ ਆਣ ਨਸਕਰਾਸ ਹਾ ਜੇ ਉਹ ਜਾਣ ਬਣ ਕੇ ਮੋਰ ਕਤਲਦਾ ਅਗਿਆਨੀ ਬਣ ਕੇ ਕੰਮ ਕਰੂਗਾ ਅਗਿਆਨਤਾ ਵਸ ਹੋ ਕੇ ਕੰਮ ਕਰੂ ਬਿਨਾ ਵਿਚਾਰੇ ਤੇ ਕੰਮ ਕਰੂਗਾ ਕਹ ਕਬ ਆਸ ਕੇ ਮੈਂ ਆਜੂਗਾ ਰਾਸਲੀ ਹਸਰਦਾ ਕੰਮ ਦਿਨੋ ਵਿਚਾਰੇ ਜੋ ਕਰੇ ਸੋ ਪਾਛੇ ਪਛਤਾਏ ਕਹ ਬਗਾੜੇ ਆਪਣੋ ਜਾਨ ਮੇਂ ਕੀ ਜਦ ਦਾ ਹਜ਼ੂਗਾ ਆ ਬੋਦਾ ਤੇ ਵਿਦੋ ਕਰੂ ਇਹ ਤਾਂ ਰਜਿਸਟਰਡ ਗੱਲ ਹੈ ਪਹਿਲਾਂ ਤੇ ਬੰਦੇ ਤੇ ਦੂਜੀ ਵੀ ਵਿਰਾਸ ਉਹ ਇੱਕ ਅੱਧ ਚੰਗੀ ਗੱਲ ਵੀ ਹੋ ਸਕਦੀ ਹੈ ਹੈ ਵੀ ਸਾਰੀ ਗੱਲਾਂ ਦਲਤੇ ਹੋਣ ਅਚਾਨਕ ਇੱਕ ਅੱਧ ਕੋਈ ਚੰਗੀ ਹੋ ਦੂਜੀ ਵਿਰਾਸ ਹੋ ਦੂਜੀ ਗੱਲ ਤੋਂ ਅਗੜੀ ਪੜਾਣਾ ਕੰਮ ਕੀਤੇ ਹੋਏ ਨੁਕਸਾਨ ਨੇ ਨੁਕਸਾਨ ਜਿਆਦਾ ਹੁੰਦਾ ਹੁੰਦਾ ਹੈ ਸਿੱਧੇ ਕੰਮ ਘੱਟ ਹੁੰਦੇ ਨੇ ਪੁੱਠੇ ਜਿਆਦਾ ਹੁੰਦੇ ਨੇ ਰਾਸ ਕੰਮ ਘੱਟ ਹੁੰਦੇ ਨੇ ਬੇਰਾਸ ਜਿਆਦਾ ਹੁੰਦੇ ਨੇ